आज तो पूरी गुरका सुन उपदेश पार ब्रह्म निकट कर पेख पूरे गुरका सुनियो उपदेश सुणे लग गए पूरे गुरका उपदेश सुनी अधुरे दाना सुनी। ना सुन ली के अधुरे दा सुन लिया फिर ते ब्रह्म नु नतनी बनना ਨਿਕਟ ਕਰਦੇ ਕਿਤੇ ਜਦ ਦੂਰ ਬਨੇ ਹੋਣਾ ਦਾ ਦੂਰ ਬਨੇ ਹੋਇਆ ਕਤੇ ਉਦੂਰਿਆ ਦਾ ਕੰਝਾਂ ਦਾ ਦੂਰ ਬਨੇ ਹੋਇਆ ਕਤੇ ਤੇ ਜਦਾਂ ਕੁਝ ਬਨੇ ਆ ਕਹਿਦਾ ਕੁਝ ਬਨੇ ਪੂਰੇ ਜੇ ਗੁਰਕਾਉ ਦੇ ਸੁਣਿਆ ਜਿਹਨੇ ਪੂਰੇ ਗੁਰਦੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਆਪਣਾ ਨਸ ਬੁਣਿਆ ਦਰਮ ਦੇ ਹੋਏ ਔਰ ਹੈ ਉਧਰ ਉਹਨਾਂ ਨੇ ਦਿਖਾੜ ਨਹੀਂ ਦਿੱਤਾ ਦੁਆ ਨੇ ਦੱਸਿਆ ਗਿਆ ਦਿਖਾ ਲਿਆ ਕਿਸੇ ਉਹਨਾਂ ਨੇ ਦੇਖਿਆ ਵੀ ਨਹੀਂ ਨਾ ਦੇਖਿਆ ਨਾ ਦਿਖਾੜਿਆ ਸਾਤ ਸੌ ਮੌਸ ਗੋਇੰਦ ਸਾਹਿਬ ਆ ਬ੍ਰਹਮਗਵਾਨੀਆਂ ਬਹੁਤ ਬਹੁਤ ਆਦਤੀਆਂ ਨੇ ਸਾਰੇ ਆਏ ਨਹੀਂ ਪਤਾ ਕਿੰਨੇ ਕਿਲੋਮੀਟਰ ਤੇ ਅਕਸ਼ਰਮ ਬਣਾਇਆ ਭਾਈ ਜਾਨ ਅਕਸ਼ਰ ਤੂੰ ਹੀ ਬਣਾਇਆ ਉਹਦਾ ਹਰ ਨਕਸ਼ੇ ਦੇ ਉੱਤੇ ਇਹ ਹੁੰਦਾ ਵੀ ਇਹ ਰਖੇ ਦੇ ਜਿਹੜੇ ਦੂਰੀਆਂ ਨੇ 1 ਸੈਂਟੀਮੀਟਰ ਜਾਂ 1 ਇੰਚ ਇਹਨੇ ਲੱਖ ਕਰੋੜ ਰੀਲ ਦੀ ਬਤਲਵਾ ਇਹਨੇ ਕਰੋੜ ਰੁਪਏ ਦਾ ਇਟਿਚ ਹੋ ਉਹਦੇ ਹਿਸਾਬ ਨਾਲ ਫਿਰ ਨਕਸ਼ਾ ਬਣੂਗਾ ਨਕਸ਼ਾ ਬਣਾ ਤਾ ਨਕਸ਼ਾ ਕਿਸ ਬੇਸ ਤੇ ਬਣਾਉਂਦੇ ਤੁਸੀਂ ਨਕਸ਼ਾ ਤਾਂ ਮ ਬਣਾਤਾ ਦਾਬਿਆ ਦੀ ਨਕਸ਼ਾ بڑا ਬਣਾ ਦੋਗੇ ਕਾਗਜ਼ بڑا ਹੋਊਗਾ ਫਿਰ ਦੂਰ ਦਿਖਾਣਾ ਕੋ ਜੇ ਛੋਟਾ ਉਹ ਨੂੰ ਛੋਟਾ ਨਕਸ਼ਾ ਛੋਟਾ ਕਰ ਦਈਏ ਕੌ ਫਾੜਾ ਕਰ ਜੂਗਾ ਫਿਰ ਕੀ ਦੂਰੀ ਘਟੂਬੂ ਇਹ ਇਹ ਸਭ ਅਧੂਰੇ ਗੁਰੂਆਂ ਦੀ ਗੱਲ ਹੈ ਅਧੂਰੇ ਗਲੇ ਬਣੇ ਸਰਦਨ ਪੂਰਾ ਪ੍ਰਵਾਹ ਆਇਆ ਪੂਰਾ ਜਾਗਰਣ ਪੂਰਾ ਘਰ ਪ੍ਰਵਾਹ ਪੂਰਾ ਬਣ ਪੂਰਾ ਪੂਰੇ ਗੁਰਕਾ ਪੂਰੇ ਗੁਰਕਾ ਪੂਰੇ ਗੁਰਕਾ ਪੂਰੇ ਗੁਰਕਾ ਸੁਣੀ ਹੈ ਵਿਦੇਸ਼ ਪਾਰ ਬ੍ਰਹਮ ਨਿਕਟ ਕਰ ਕੇ ਪੂਰੇ ਗੁਰਦਾ ਸੁਣੀ ਹੈ ਵਿਦੇਸ਼ ਪੂਰੇ ਗੁਰਦਾ ਉਹਦੇ ਸੁਣੀ ਜੇ ਪਾਰ ਬ੍ਰਹਮ ਨੂੰ ਨੇੜੇ ਦਰਸ਼ਨ ਹੋਊਗਾ ਵਰਨਾ ਨਹੀਂ ਹੋਣਾ ਪਾਰ ਬ੍ਰਹਮ ਢਿੱਕ ਕਰ ਇਕਟ ਕਰਕੇ ਹੁੰਨੇਗਾ ਤਾਂ ਦਰਸ਼ਨ ਹੋਊਗਾ ਦੂਰ ਨਹੀਂ ਹੋਣਾ ਦਰਸ਼ਨ ਹਾਂ ਸਾਹ ਸੁ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਨੇਕ ਤਾਂ ਦੂਰ ਕੀ ਹੈ ਬਾਹਰ ਮੁਖੀ ਹੋ ਕੇ ਦੇਖਦਾ ਦੂਰ ਹੈ ਅੰਤਰ ਮੁਖੀ ਹੋ ਕੇ ਦੇਖਦਾ ਨੇੜੇ ਜਿਹੜਾ ਪੂਰਾ ਦਰਸ਼ਨ ਕਰਾਊਗਾ ਪੂਰਾ ਕਰੋ ਦਰੋ ਕਰਾਊਗਾ ਜਿਹੜਾ ਅਧੂਰਾ ਦਸੂ ਬਾਹਰ ਦਸੂਗਾ बारह है ओदी सब बार कुछ घर में बाहर नहीं बाहर दौले से बाहर दौले बाहर रुक पूरे गुरका सुनी उपदेश पारब्रह्म निक्त कर, पे। पार कर देख पारब्रह्म नु निक्त करके देखला तरिया साथ-साथ सिमरो गोविंद मन अंतर की उतरे चिंत्स साथ-साथ सिमरो गोविंद ये करके साथ-साथ गोविंद दा सिमरन करो अंदर ਕਿਸਾ ਲਖਾਵੋਨਾ ਹੈ niche dor karan ha the chalon karu manantar ki utray chit manantar ki utray chit saath saath samrog gobind manantar ki utray chit ja gobind andar hi gaya pe chitta ਵਿਖਾਦੀ ਮਣਵਾ ਲਬਦ ਫਿਰ ਦਸੀ ਉਹ ਕੁਰਸੀ ਤੇ ਤਖਤੇ 'ਤੇ ਬੈਠਾ ਦਾ ਰਾਜਾ ਰਾਜ ਵੀ ਕੋੜੇ ਤਾਂ ਸੁਪਨਾ ਹੀ ਆਇਆ ਹੋਇਆ ਸੀ ਸੁਪਨਾ ਹੀ ਵਿਖਾਦੀ ਸੀ ਜਾਂ ਜਾਗਿਆ ਸਭ ਕੋ ਕੋੜੇ ਸੀ ਮਨ ਉਤਰ ਕੇ ਉਤਰੇ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਧੂਰ ਮਲ ਮੰਗ ਆਸ ਅਨਿਤ ਇਹ ਦਸ ਨਹੀਂ ਹੈ ਇਹ ਅਦਿਤ ਨਾਸਮਤ ਦਾ ਅਨਿਤ ਨਾਸਮਤ ਨੂੰ ਕਹਿੰਦੇ ਨੇ ਦੇਤੇ ਜਿਹੜਾ ਹੁੰਦਾ ਨਿਤ ਲਫਦਾ ਨਿਤ ਸਦਾ ਨੂੰ ਕਹਿੰਦੇ ਨੇ ਨਿਤ ਸੁਖ ਸਦਾ ਸੁਖ ਅਨਿਤ ਸੁਖ ਨਾਸਮਤ ਸੁਖ ਆਸ ਅਦਿਤ ਤੇ ਦੀ ਆਸ ਹੈ ਤਾਂ ਨਾਸਮਤ ਦਾ ਹੈ ਤਿਆਗੋ ਇਹਦੀ ਜਿਹੜੀ ਤਰੰਗ ਉੱਠਦੀ ਆਂ ਤਰ ਇਹਨੂੰ ਤਿਆਗ ਦੋ ਅਤੇ ਦਾਸ ਨੂੰ ਵਾਯਾ ਦੀ ਆਸ ਨੂੰ ਅਰੇ ਤਿਆਗੋ ਤਰੰਗ ਇਹਦੀ ਤਰੰਗ ਤੇ ਦੋ ਤਰੰਗ ਤੇ ਤਨ ਰੰਗ ਰਜੋਦਮ ਸਤੋ ਦੀ ਇਹਦੀ ਆਸਾਂ ਛੱਡ ਦੇਓ ਇਹਨੂੰ ਇਹ ਤਰੰਗ ਆਉਂਦੀ ਆ ਲੈਨ ਤਰ ਇਹਦੀ ਤਰੰਗਾਂ ਜਿਹੜੀ ਨਾ ਲਹਿਰ ਲਹਿਰ ਉੱਠਦੀ ਆ ਤਰੰਗ ਲਹਿਰ ਰੋਹ ਜਾਂਦੀ ਨੇ ਇਹ ਲਹਿਰਾਂ ਨੂੰ ਤਿਆਗ ਦੋ ਆਸ ਹਉਦਿਤ ਤਿਆਗੋ ਤਰੰਗ ਉੱਥੇ ਕਿ ਜਾ ਕੇ ਮਰ ਜਾਣਾ ਲਹਿਰ ਨੇ ਕਿਤੇ ਦੂਰ ਜਾਂਦੀ ਲਹਿਰ ਬਾਦ ਦੀ ਉਮਰ ਕਿਤੇ ਹੋਦੀ ਹੈ ਜਿੱਤੇ ਤੱਕ ਪਾਣੀ ਉੱਥੇ ਦਾ ਗੱਲ ਹੈ ਚਪੜੀ ਦਾ ਪਾਣੀ ਕਿੰਨਾ ਖੁੰਦਾ ਫਫਾ 10 ਮਿੰਟ ਦੀ ਆਸ ਹੁੰਦੀ ਜਦ ਇਹ ਲਹਿਰ ਉੱਤੇ 10 ਮਿੰਟ ਦੀ ਹੋਊਗੀ ਹਾਂਜੀ ਆਪ ਅਨੇਤ ਪਿਆਗੋ ਤਰੰਗ ਸੰਤ ਜੀ ਨਾਲ ਕੀ ਮੰਗੋ ਤਿਆਗੋ ਤਰੰਗ ਹੈ ਤਰੰਗ ਤਿਆਗ ਦੋ ਇਹਨਾਂ ਆਸ ਹੁੰਦੀ ਸਾਰੀਆਂ ਚੀਜ਼ਾਂ ਦਾਸ ਵਾਸ ਇੱਛਾ ਹੈ ਦਾਸ ਵਾਸ ਤਵਸੂ ਦੀ ਇੱਛਾ ਹੈ ਇਹਦੀ ਤਰਕ त्याग दो एदी इच्छा त्याग दो साते जना की तोड़ मनवाओ बस्ते विच इच्छा कादी बंगी कादी रखो साते जना दा तेरा ज्ञान है आत्म ज्ञान टूट गया नु कहना क्याते तोड़ ए ज्ञान दी तोड़ को साते जना की तोड़ मनवाओ ਮਾਟੇ ਵਿੱਚ ਇਹ ਨਹੀਂ ਹੁੰਦਾ ਖੋਚਾ ਰਖੋ ਬਭਿਛਾਈ ਹੁੰਦੀ ਆ ਆਪ ਛੋਟ ਬੇਨਤੀ ਕਰੋ ਸਾਧ ਸੰਗੀ ਅਗਲ ਆਪ ਛੋਟ ਆਪਣੀ ਜਨਨ ਚੇਤਨੂ ਤੇ ਧਿਆਨ ਕੇ ਘੱਡੂਗਾ ਵੰਦੀਆ ਰੱਖਾ ਜੀ ਇਛਦੋ ਜਤਨ ਛੱਡੋ ਆਪ ਛੋਟ ਬੇਨਤੀ ਕਰੋ ਵਰਤੀ ਲੈਣ ਵਾਲਾ ਜਤਨ ਛੱਡੋ خیال ਛੱਡੋ ਆਪ ਛੋੜ ਬੇਨਤੀ ਕਰੋ ਬੇਨਤੀ ਕਰੋ ਇਹਦਾ ਬੇਨਤੀ ਨਾ ਲੈਣਾ ਨਾਮ ਆਪ ਤੁਸੀਂ ਕੀ ਕਰ ਸਕਦੇ ਆ ਆਪ ਸਮਝ ਸਕਦੇ ਸੀ ਉੱਥੇ ਤੁਹਾਡਾ ਸੀ ਗੁਰਬਾਣੀ ਨੂੰ ਉਦਮ ਦਾ ਵਿਚਾਰਾਂ ਜਿੱਥੇ ਤੱਕ ਗੁਰਬਾਣੀ ਵਿਚਾਰਨ ਦੀ ਗੱਲ ਸੀ ਉੱਥੇ ਤੱਕ ਤਾਂ ਆਪਣਾ ਸੀ ਕੁਝ ਛੋਟੀ ਗੱਲ ਹੀ ਹੈ ਤਾਂ ਇਰਾਦਨਾ ਉੱਥੇ ਆਪਣਾ ਕੋਈ ਯੋਗ ਨਹੀਂ ਆਪਣੇ ਉੱਥੇ ਜਾਉਂਦੇ ਉਹ ਤਾਂ ਅਰਥ ਕੋਰਖੇ ਨੇ ਪਾਉਣਾ ਵੀ ਪਿਆ ਪਰਮੇਸ਼ਰ ਪਾਇਆ ਉਸੇ ਨਾਲ ਦੀ ਚਾਹਤ ਦੀ ਤੇ ਹੈ ਸਾਡੇ ਵਸਦੀ ਕੋਈ ਗੱਲ ਨਹੀਂ ਵੀ ਪਿਆ ਪਰਮੇਸ਼ਰ ਪਾਇਆ ਉਸੇ ਦਾ ਪਰਮੇਸ਼ਰ ਦੀ ਅਰਾਧ ਨਹੀਂ ਕਰਾਂ ਭਾਈ ਵੀ ਪਾਦੇ ਹੁਣ ਤੇਰੇ ਵਸਦੀ ਗੱਲ ਹੈ ਸਾਡੇ ਵਸਦੀ ਗੱਲ ਨਹੀਂ ਜਿੱਤੇ ਵਸਦੀ ਗੱਲ ਨਹੀਂ ਹੈ ਉਸੇ ਦਾ ਫਿਰ ਅਰਾਧ ਨਹੀਂ ਹੈ ਆਪ ਝੋਲ ਬੇਨਤੀ ਕਰੋ ਨਹੀਂ ਤੁਸੀਂ ਵੀ ਪਵਾ ਸਕਦੇ ਕਿਸੇ ਤਰੀਕੇ ਨਾਲ ਵੀ ਇਜਤਲ ਤੁਸੀਂ ਜਿਹੜੀਆਂ ਸਕੀਮਾਂ ਚ ਘੜਦੇ ਹੋ ਨਾ ਰੋਜ਼ ਬਿਵੀ ਆਫਰ ਬੋ ਲੈ ਕਰ ਫੇ ਇਹ ਤੁਮ ਜਾਓ ਹੀ ਨਾ ਜਦੋਂ ਤੁਸੀਂ ਨਹੀਂ ਪਾਉਣ ਤੇ ਟਾਈਮ ਵੇਸਟੀ ਜਿੰਨਾ ਪੈਸਾ ਖਰਚ ਕਰੋਗੇ ਦੁਨੀਆ ਵਰਜੂਗੀ ਜਾਨੂ ਅੱਧੀ ਉਦਾਂ ਹੀ ਭੁਖੀ ਤੁਸੀਂ ਜਦ ਵਿੱਚ ਕਰੀ ਜਾਂਦਾ ਤੁਸੀਂ ਗਰੀਬ ਹੋਈ ਜਾਂਦੀ ਹੈ ਪੈਸੇ ਹੋਣੇ ਤੋਂ ਵਧੀ ਕਰੀ ਜਾਂਦੇ ਜਿੱਤਰ ਪੈਸਾ ਖਰਚ ਕਰਦਾ ਖੋਜ ਖਾ ਕੇ ਫਿਰ ਛੱਡੋ ਖਰਚ ਕਰ ਨਹੀਂ ਹੁੰਦੀ ਸਮਾਏਗਾ ਕੋਈ ਨਾ ਓੜਾ ਉਹ ਕਿਵੇਂ ਅੰਦਰ ਵਿਚਾਲੋ ਇਹਨਾਂ ਦਾ ਹੋਤਾ ਹਾਂਜੀ ਆਪ ਛੋੜ ਬੇਨਤੀ ਕਰੋ ਸਾਧ ਸੰਗੀ ਅਗਰ ਸਾਗਰ ਕਰੋ ਆਪ ਛੋੜ ਬੇਨਤੀ ਕਰੋ ਸਾਧ ਸਭ ਕੀ ਸਾਧ ਦੀ ਸੰਗਤ ਸੱਚ ਦੀ ਸੰਗਤ ਸੱਚਿਆਰਿਆਂ ਦੀ ਸੰਗਤ ਰੱਖੋ ਸਾਧ ਸੱਚਿਆਰਿਆਂ ਨਾਲ ਕੂੜਿਆਂ ਦੀ ਸੰਗਤ ਛੱਡੋ ਸੱਚਿਆਰਿਆਂ ਦੀ ਸੰਗਤ ਵਿੱਚ ਆ ਜਾਓ ਸੱਚਿਆਰਿਆਂ ਦੀ ਸੰਗਤ ਵੱਖਰੀ ਬਣਾ ਲਓ ਅਗਰ ਸਾਗਰ ਕਰੋ ਜੇ ਅਗਨ ਸਾਧਨ ਕਰਨਾ ਹੈ ਇਹ ਆਖਰੀ ਅਸਬਦੀ ਅੱਜ ਦੇ ਸਾਰੇ ਸੰਸਾਰ ਤੋਂ ਸਿੱਖਿਆ ਅੱਜ ਦਾ ਜੋ ਸੰਸਾਰ ਜਿੱਥੇ ਅਸੀਂ ਖੜੇ ਹਾਂ ਸਾਰਿਆਂ ਵਾਸਤੇ ਸਿੱਖਿਆ ਜੇ ਅਗਨ ਸਾਧਨ ਕਰਨਾ ਜੇ ਅਗਨ ਸਾਧਨ ਜੋ ਬਚਣਾ ਅੱਗ ਦੇ ਸਾਗਰ ਦੇ ਵਿੱਚ ਅੱਗ ਜਲਦੀ ਹੈ ਸਮੁੰਦਰ ਦੇ ਵਿੱਚ ਵਿੱਚ ਖੜੇ ਹਾਂ ਸਾਰੇ ਸਾਰਿਆਂ ਦੇ ਅੰਦਰ ਅੱਗ ਜਲਦੀ ਹੈ ਵਹਿਰ ਭਾਵਨਾ ਦੀ ਦੁਵਾ ਦੇ ਵਰੂ ਤੇ ਖੜਾ ਨਹੀਂ ਜਾਂਦਾ ਸਾਰਾ ਮਲ ਬਰੂ ਤੇ ਘਿਰਦਾ ਦੁਨੀਆ ਬੈਠੀ ਹੈ ਆਗ ਵਾਲੇ ਅਗਮ ਅਧੀ ਹੈ ਜੇ ਤੋ ਵਧਣਾ ਚਾਹੁੰਦੇ ਨੇ ਤਾਂ ਸਤਿਆ ਇਕੱਠੇ ਹੋ ਜਾਣ ਸਾਧੂ ਇਕੱਠੇ ਹੋ ਜਾਣੇ ਕੋ ਪਾਸ ਤਾਂ ਬਚਾ ਸਕਦੇ ਨੇ ਅਗਰ ਸਾਧਾ ਕਰਿਆ ਜਾ ਸਕਦਾ ਇਹਨਾਂ ਨੂੰ ਕੱਢ ਸਕਦੇ ਨੇ ਬਰਸਾ ਨਾਲਾ ਵਾਣਾ ਨੂੰ ਵਾਜਸਾ ਬਦੂ ਨੇ ਬਾਜਸਾਨੀ ਫੜਦੀ ਹੈ ਬਾਂਦਰ ਆਵੜੇ ਫਰੇਗਦੇ ਹੱਥੀਂ ਮਾਸਾ ਮਾਟਿਆ ਸਰ ਬਾਜਾ ਹਰ ਡਾਲ ਤੇ ਉਲੂ ਬੈਠਾ ਹੈ ਫਿਰ ਜਾਂ ਹੈ ਗੁਰੂ ਸਾਹਿਬ ਤੇ ਉਲੂ ਬਹਿ ਗਿਆ ਕੇ ਗੋਸਤਾਂ ਦਾ ਫਿਰ ਕੀ ਹੋਊਗਾ ਉਹਦਾ ਸਭ ਨੂੰ ਪਤਾ ਹੀ ਹੈ ਇਹ ਤਾਂ ਹੈ ਕਿਹਾ ਕਿ ਤਾ ਬੈਠਾ ਇੱਥੇ ਹੁਣ ਆਪਸੋ ਹਰ ਬੰਦੇ ਐਤਿੰਨ ਮਾਚਾ ਸ ਭਾਈ ਨੇ ਭਾਈ ਨੂੰ ਮਾਰਦਾ ਜੀ ਗੋਲੀ ਨਾਲ ਮਾਰਦਾ ਇਹ ਗੱਲ ਨੇ ਹੋਰ ਗੱਲ ਇਹ ਗੱਲ ਹੈ ਮਾਇਆ ਦਾ ਪਰਮਾਤਮਾ ਮਾਇਆ ਕੋਈ ਨਹੀਂ ਬਚਾ ਸਕਦਾ ਆਸ਼ਪਤ ਬਚਾਉਂਦੀ ਆ ਹੁਣ ਸਾਥ ਸੰਗਤ ਅੱਗੇ ਜੇ ਅੱਜ ਸਰਕਾਰ ਕਰਨਾ ਸਾਥ ਇਕੱਠੇ ਹੋ ਜਾਓ ਇਹ ਦੁਨੀਆ ਦੇ ਧਰਮ ਦੇ ਵਿੱਚ ਜੇ ਕੁਝ ਆਦਮੀ ਨੇ ਇੱਕ ਤੋਂ ਹੋ ਜੋ ਸਾਰੇ ਇਕੱਠੇ ਤੋ ਦੋ ਪਲੇਟਫਾਰਮ ਕਾ ਨੇ ਦੋ ਪਲੇਟਫਾਰਮ ਨੇ ਫਿਰ ਸੱਚਾਰੇ ਨਹੀਂ ਆਗੇ ਤੁਸੀਂ ਫਿਰ ਬੇਈਮਾਨ ਹੋ ਤੋ ਸੱਚਾਰੇ ਲੱਗਾ ਹੈ ਕਿ ਬੇਈਮਾਨ ਜੇ ਇਕੱਠੇ ਦੀਓ ਤਾਂ ਸਾਭੀ ਬੇਈਮਾਨ ਹੋ ਛੋਟਾ ਮੰਨ ਛੋਟਿਆ ਹੋਰ ਕੀ ਹੈ ਹਾਂਜੀ ਹਰ ਧੰਕੇ ਪਰਿਓ ਪੁਢਾਰ ਨਾਨਕ ਗੁਰਪੁਰੇ ਨਮਸਕਾਰ ਆਇਆ ਧੂਆ ਸੰਥਾਰੇ ਫਰਾਡ ਕਰ ਕਰਕੇ ਬੈਠਾ ਜੀ ਪੈਸਾ ਰੱਖਦੇ ਛਡੋ ਉਧਰ ਜਾਓ ਹਰ ਧੰਕੇ ਪਰਿਓ ਪੁਢਾਰ ਆਲਾ ਤਾਂ ਜੁੜਿਆ ਹੋਇਆ ਹੋ ਕਹਿੰਦੇ ਐ ਕਢਾਓ ਆ ਕਾਲਾ ਚਿੱਟਾ ਤਾਂ ਛਡੋ ਹਰ ਉਹ ਤੁਹਾਨੂੰ ਦੇ ਭੰਡਾਰ ਭਰੋ ਹਰ ਧਰ ਕੇ ਭਰ ਲਿਓ ਭੰਡਾਰ ਨਾਨਕ ਗੁਰੂ ਪੂਰੇ ਨਾਮ ਸਕਾਰ ਜਿਹੜਾ ਕੋਈ ਐਸੀ ਗੱਲ ਦੱਸੇ ਜਿਹੜਾ ਕੋ ਭੰਡਾਰ ਐਸੇ ਭਰਾਵੇ ਚਲੋ ਪੂਰਾ ਗੁਰ ਉਹਨੂੰ ਨਿਭਦਾਰ ਕਰ ਲੋ ਕੇਸੇ ਲੱਭ ਲੋ ਜਾ ਕੇ ਆਕਰਜਣਾ ਰਹੋ ਵੀ ਮਹਾਰਾਜਪਤੀਆਂ ਆਕਰਜਣਾ ਰਹੋ ਵੀ ਮਨਿਸਟਰਾਂ ਦੇ ਚੀਫ ਸੈਕ੍ਰੇਟਰੀ ਪ੍ਰਾਈਮ ਮਨਿਸਟਰਾਂ ਕੀ ਕੋਈ ਗੋਲੀ ਚਾਹੀਦੀ ਹੈ ਰੇਹ ਦੂਜੀ ਲੋੜ ਨਹੀਂ ਖੋਪੜੀ ਜਿਹਾ ਲੱਗਿਆ ਚਾਹੇ ਅਤਵਾਦੀ ਹੈ ਚਾਹੇ ਰਾਸ਼ਟਰਪਤੀ ਇੱਕੋ ਜਿਹਾ ਇਸਰੀਲ ਨੇ ਸਾਡੇ ਇਹ ਰਾਹ ਨਹੀਂ ਠੀਕ ਹਨ ਬਾਹਰ ਬਰੋਣ ਵਾਲਾ ਮੈਂ ਆਹ ਨਾਲ ਸੁਰੱਖਿਆ ਰਾਖ ਕੇ ਜਗਾ ਬੰਦੇ ਰੱਖ ਕੇ ਆਪਣੇ ਬੱਚੇ ਕਰ ਲੋ ਮੈਂ ਦੂਜਿਆਂ ਨੂੰ ਇਹ ਕਰ ਲੋ ਇਹ ਰਾਹ ਚ ਮਾਰੀ ਹੈਗਾ ਵਿਚਾਰ ਵਾਲਾ ਰਸਟ ਬੈਠਾ ਵਿਚਾਰ ਹੁੰਦੀ ਲੋੜ ਜਦੋਂ ਇੱਥੇ ਤੱਕ ਆਜਵੇ ਤੇ ਫੇਰ ਮੁਸ਼ਕਲੇਗਾਲ ਹੈ ਸਿਰ ਵਿਚਾਰਨਾ ਚਾਹੀਦਾ ਵੀ ਇੱਥੇ ਤੱਕ ਵਿਗੜ ਕਿਉਂ ਗਈ ਹਾਲਤ ਇੰਨੀ ਗੋਟੀ ਦੀ ਟੋ ਰੋਡ ਤੇ ਜੀ ਜਿਹੜੇ ਕਿ ਸੇਵਾ ਕਰਨ ਵਾਲੇ ਹੁੰਦੇ ਨੇ ਪਬਲਿਕ ਦੀ ਉਹਨਾਂ ਨੂੰ ਇੰਨਾ ਖਤਰਾ ਕਿਉਂ ਹੈ ਸੁਰਗਰ ਦੇ ਕਿਉਂ ਪਟਦੇ ਨੇ ਸੇਵਾ ਕਰਨ ਵਾਲੇ ਦੀ ਹਨ ਅਸਰ ਸੇਵਾ ਕਰਨ ਵਾਲੇ ਜੇ ਹੁੰਦੇ ਤਾਂ ਖਤਰਾ ਨਹੀਂ ਸੀ ਹਟ ਕੁਝ ਕਿਤੇ ਨਾ ਕਿਤੇ ਗੜਬੜ ਜੂਰ ਉਹ ਗੜਬੜ ਨੂੰ ਲੱਭੋ ਕਿਉਂ ਹੈ ਉਹਨੂੰ ਹਟਾਓ ਗੜਬੜ ਨੂੰ ਵਿਚੋਂ ਤੂੰ ਆਪੇ ਸ਼ਾਂਤ ਹੋ ਜਾਵੇਂਗਾ ਹਾਂ ਜੀ ਹਰ ਧਨਕੇ ਪਰ ਲਿਓ ਪੁੰਡਾਰ ਨਾਲਕ ਗੁਰਪੁਰੇ ਨਮਸਕਾਰ ਨਾਲਕ ਗੁਰਪੁਰੇ ਨਮਸਕਾਰ ਜਿਹੜਾ ਕੋਈ ਇਹੇਗਾ ਗੁਰਪੁਰੇ ਆਉਣ ਬਾਹਰ ਟਲਕੇ ਉਹਨਾਂ ਨੂੰ ਉਹਨਾਂ ਨਮਸਕਾਰ ਕਰ ਲੋ ਵੀ ਹੁਣ ਤੁਸੀਂ ਵਿਚਾਲੋ ਸਾਡੇ ਤਾਂ ਗਲਤੀ ਹੋ ਗਈ ਢਾਖਲਿਓ ਹੁਬ ਤੇ ਕਹਿੰਦਾ ਸਾਥੋਂ ਤਾਂ ਭਟੜ ਗਈ ਹੁਣ ਢਖਲੋ ਤੁਸੀਂ ਕਰੋ ਉਹਨਾਂ ਨੂੰ ਪੁਰੇ ਕਰ ਲੋ ਜੇ ਭਜਣਾ ਉਹਨਾਂ ਤੋਂ ਕੋਈ ਫਾਇਦਾ ਨਹੀਂ ਫਰਕ ਨਹੀਂ ਪੈਂਦਾ ਉਹਦਾ ਪਹਿਲਾ ਪਰਿਭਾਅ ਉਹਨਾਂ ਨੂੰ ਹੁਤਾ ਜ਼ਿੰਦਗੀ ਦਾ ਕੋਈ ਬਦਲ ਨਹੀਂ ਤੁਹਾਨੂੰ ਹੋਊਗਾ ਇਹ ਬਹੁਤ ਮਤਲਬ ਜਿਆਦਾ ਥੋੜਾ ਸੁਰਖਰ ਨਹੀਂ ਵੜ ਲੈਣਾ ਇਹਨਾਂ ਨੇ ਸਭ ਕੁਝ ਨਸ਼ਕਾ ਦੇਣਾ ਜਿਹੜਾ ਬਣਾਇਆ ਬਣਾਇਆ ਹੋਇਆ ਵਧੀਆ ਵਧੀਆ ਬਿਲਡਿੰਗਾਂ ਵਧੀਆ ਵਧੀਆ ਸ਼ਹਿਰ ਕੁਛ ਨਹੀਂ ਰਹਿਣਾ ਦੁਨੀਆਂ 'ਚ ਸਭ ਖਾਕ ਦੇ ਭੜਜੂਗਾ ਜਦੋਂ ਬੱਬ ਜਲ ਗਏ ਤੁਸੀਂ ਬੜੀ ਰੀਜਣਾ ਬਣਾਇਆ ਇਹਨਾਂ ਸਭ ਕੁਝ ਵਿਟੀਂ ਬਣਾ ਕੇ ਰੱਖਦੇ ਨੇ ਇਹ 'ਚ ਇਹ ਪਾਜਦਾ ਵਿਦਿਆਲੋ ਨੇ ਬਿਠਾਉਣੇ ਰੋਜ਼